ਜੇ ਨਿਰਮਲ ਪੁਰਖ ਪੁਰਖਪਤੀ ਹੋਤਾ ਤੈ ਬਿਨ ਮੈਨ ਕਹੋ ਕਿਆ ਧੋਤਾ ਜਬ ਨਿਰਮਲ ਪੁਰਖ ਪੁਰਖਪਤੀ ਹੁੰਦਾ ਜੇ ਨਿਰਮਲ ਪੁਰਖਾ ਨਿਰਮਲ ਬ੍ਰਹਮ ਮਾਨ ਦੇ ਜੇ ਜਿਹੜਾ ਦੂਆ ਮਾਨ ਮਲੀਰ ਉਹ ਪੁਰਖ ਗਿਆ ਇੱਕ ਬਿਰਭੂਰ ਪੁਰਖਾ ਉਹ ਬਲੀਨ ਪਰਖਾ ਨਹੀਂ ਹੁਣ ਪੁਰਖ ਹੋ ਗਿਆ ਨਬੂਦ ਨਾ ਪੁਰਖ ਹੋ ਗਿਆ ਪੁਰਖ ਹੋ ਗਿਆ ਉਹਨੇ ਬਲੀਦਤਾ ਤੇ ਹੱਸ ਕੇ ਦਿੱਤੀ हो गया ਮੰਨ ਚਾਹ ਕੋਰ ਜੀ ਉਹ ਤੇ निर्मल ਹੋ है ਨਿਰਮਲ ਪੁਰਖ ਪੁਰਖਪਾਸਾ ਹੋ ਤਾ ਜਿਹੜਾ ਨਿਰਮਲ ਪੁਰਖਾ ਉਹਨੇ ਨਰਮਲ ਪੁਰਖ ਦੀ ਸਰਦਾਰੀ ਜਿਹੜਾ ਪੁਰਖ ਸੀ ਮਨ ਸੀ कबूल ਕਬੂਲ ਕਰ ਅਮ ਤੇ ਉਹਦੇ ਅਨੁਸਾਰ ਹੋ ਗਿਆ ਅਨਸਾਰੀ ਹੋ ਗਿਆ ਨਾ ਪਰ ਜਿੱਤ ਨੇ ਮਨ ਨੂੰ ਸਮਝਾ ਲਿਆ ਮਨ ਸਮਝਾਉਣ ਲੱਗਾ ਉਹਨੇ ਪੜ੍ਹਿਆ ਇਤਨਾ ਗਿਆਨ ਪੜ੍ਹ ਲਿਆ ਕਿ ਉਹਨੇ ਮਨ ਆਪਣਾ ਸਮਝਾ ਲਿਆ ਇਹ ਮਨ ਵੱਡਾ ਕਜਾਸੋਂ ਮਨ ਉਹ ਸੱਤ ਜੇਡ ਕਿਹਾ ਹੋਇਆ ਤਾਂ ਜਿਸ ਨੂੰ ਹਰ ਜੇਡ ਉਹਦੇ ਤੋਂ ਜੋ ਪੈਦਾ ਹੁੰਦਾ ਹੈ ਵੱਟੇ ਨੇ ਛੋਟੇ ਨੂੰ ਸਮਝਾ ਲਿਆ। ਤੁੰਦ। ਤੇ ਬਿਨ ਮਹਿਲ ਕਹੋ ਕਿਆ ਤੋਤਾ? ਕਹਿ ਤਾਂ ਮਹਿਲ ਹੈ ਵੀ ਫਿਰ। ਪਰ ਤਾਂ ਮਹਿਲ ਹੈ। ਤੋ ਤਾਂ ਮਹਿਲ じゃ ਸਮਝਾ ਲਿਆ ਮਹਿਲ ਤਾਂ ਛੜਤੀ ਪਹਿਲਾਂ ਹੀ। ਫਿਰ ਉਹ ਤੇ ਢੋਲੂ ਕਿ ਗਿਆ। ਜੇ ਕਿੰ ਤੋਂ ਨੋ ਕੋਈ ਨਹੀਂ ਰਿਆ ਫਿਰ ਉਹਨੇ ਇਥੇ ਸੰਸਾਰ ਦੀ ਚੱਲ ਉਹ ਚੱਲ ਜਾਊਗਾ ਰਾਤ ਆ ਦੇਸ ਜਦੋਂ ਉਹ ਖਜਲਾ ਹੈਗਾ ਨਿਰਮਲ ਕੋ ਜਰਮਲ ਕੋ ਬ੍ਰਹਮ ਹੋ ਜਾਂਦਾ ਕਬੀਰ ਮੰਨ ਨਿਰਮਲ ਤੇ ਜੈਸੇ ਗੰਗਾ ਰੇਤਿਨ ਸਾਚੇ ਲਾਗੋ ਹਰ ਕਹਿਤ ਕਬੀਰ ਕਬੀਰ ਫਿਰ ਹਰ ਵੀ ਜਿਹੜਾ ਹੈਗਾ ਹਰ ਦੇ ਪਿੱਛੇ ਲੱਗਿਆ ਫਿਰਦਾ ਇਹ ਮਾ ਨਰਮਨ ਯਾਦ ਹੋ ਜਾਂਦਾ ਮੈਂ ਹਰ ਦੇ ਪਿੱਛੇ ਲੱਗਦਾ ਪਹਿਲਾਂ ਮਾਇਆ ਦੇ ਪਿੱਛੇ ਭਜਦਾ ਨਾ ਮਾਇਆ ਦਾ ਪਿੱਛਾ ਛੱਡ ਕੇ ਫਿਰ ਹਰ ਦੇ ਪਿੱਛੇ ਪਾਛੇ ਲਾਗੋ ਹਰ ਫਿਰੋ ਕਹਿੰਦੇ ਹਰੀ ਦੇ ਪਿੱਛੇ ਲੱਗੇ ਫਿਰ ਵਾਹ ਦਾ ਆਦੇਵ ਰਾਜ ਉਹ ਕਹੇ ਉਹ ਕਹਦੇ ਦੁਰਿਆਲੀਏ ਕਦੇ ਟਿਗਿਆ ਦਿੱਤੇ ਕਾਲ ਜਦ ਹਜ਼ਾਰ ਕਿਲੋਮੀਟਰ ਰੋਜ਼ ਭੱਜਣ ਦੇ ਕਾਲਮਿਕਾ ਦਾ ਸੁਰੀਆ ਦੀ ਉਹ ਫਲੋਰ ਉੱਤੇ ਕਲੂਕਾ ਪੁੱਗ ਉਹਦੇ ਪਿੱਛੇ ਤਰਫੂ ਉਹ ਤਾਂ ਕਹਿੰਦਾ ਤੁਰੇ ਜਿਹੜਾ ਰੋਜ਼ ਭੱਜਣ ਵਾਲਾ ਇਹ ਹਾਜ਼ਰ ਵਿਚਾਰਾ ਤੁਰਦਾ ਨਹੀਂ ਉਹ ਤਾਂ ਹਿਲਦਾ ਹੀ ਨਹੀਂ ਉਹ ਪਿੱਛੇ ਲੱਗਾ ਕੀ ਫਿਰ ਨਾਲ ਵਾਲੇ ਕਿਹੜੇ ਕਹਿੰਦਾ ਉਹਦੇ ਜੋ ਆਪਣੇ ਆਤਮੂਹੇਿਕ ਲੰਦਾ ਵੀ ਇੰਨੀ ਵਾਰਦਾ ਮੈਂ ਚਲ ਰਹੀ ਉਦੇ ਆਣ ਵਾਲੇ ਗੋਲੂ ਦੇ ਬੋਲਦ ਨੂੰ ਉਦੇ ਆਣ ਵਾਲੇ ਕੋ ਮਲੇਦ ਵੀ ਤੇਰੇ ਆਣ ਵਾਲੇ ਪ੍ਰਕਰਮਾਂ ਹੀ ਗੱਲ ਲੈਂਦਾ ਮੈਂ ਤੇਰੀ ਉਹ ਵੀ ਉਹ ਪ੍ਰਕਰਮਾਂ ਹੀ ਗੱਲ ਲੈਂਦਾ ਹੂੰ ਫਿਰ ਹਰਦਾ ਨਹੀਂ ਕਰ ਉਸ ਤੇ ਵੀ ਭਾਈ ਐਸੇ ਕੋ ਬੁਲਾਉਂ ਜੋ ਮੰਨਦਾ ਨਿਰੰਕਾਰ ਨਿਰਵਾਣ ਜੈ ਨਰਿੰਜਨ ਨਿਰੰਕਾਰ ਨਿਰਵਾਣ ਜੈ ਨਰਿੰਜਣਾ ਸਰਪੇ ਇਹ ਵੀ ਜੋਗੀ ਦੀ ਜਦ ਨਰਜਣੀਆਂ ਜੋਤੇ ਅਸਲ ਦੀ ਸਰੰਕਾਰ ਹੈ ਆ ਨਰਜਣ ਜਿਹੜਾ ਆਇਆ ਨਾ ਐਤੋ ਜੋਗੀਆਂ ਦਾ ਇਹੋ ਜਿਹਾ ਕਰਨ ਜੋਤ ਉਪਰ ਸਰ ਅੰਦਰ ਚਲਦੀ ਹੈ ਆ ਨਰਜਣ ਜੋਤਾ ਜਿਹੜਾ ਇਹਨਾਂ ਦਾ ਸੀ ਜੋ ਤੁਸੀਂ ਦਾ ਕਬਜ਼ਾ ਰਿਹਾ ਸਰ ਉਹਨਾਂ ਦਾ ਇਹੋ ਜਿਹਾ ਜੜੀ ਉਸੇ ਚਲਦੀ ਹੈ ਉਹ ਸਾਰੇ ਜਲਣ ਲੱਗੀਆਂ ਘਟਣਾਓ ਜੋਤਾਂ ਲਗਾਉਣੀ ਦੀ ਮੇਰਾ ਘਰ ਦੀ ਦੀਵਾਲੀ ਜੀਉਂਦੀ ਜਿਉਂਦੀ ਤਾਂ ਦੀਵਾਲੀ ਰੋਕ ਕੇ ਉਪਰ ਨੂੰ ਦੇ ਦਿੰਦੇ ਕਿੱਥੇ ਉਹ ਜਾਂਦਾ ਕਿ ਉਹ ਕਠਾ ਇੰਨਾ ਕੈਂਚੀ ਅਸਲ ਵਿੱਚ ਤਾਂ ਜੋਤਾਂ ਜਿਹੜੀ ਸੀ ਉਹ ਵਦਗਾੜ ਜੋਤਾਂ ਕਰਦੀ ਸੀ ਕਿ ਉਹੋਂ ਤੇ ਬੰਦ ਹੋ ਗਿਆ ਉਹ ਕਹਿੰਦੇ ਤਾਂ ਕਠਾ ਪੈ ਗਿਆ ਸਭੇ ਸੱਤ ਅੱਧ ਪੀਂਦੇ ਦਿੰਦੇ ਚੜ ਜਾਂਦੇ ਸੀ ਕਹਿੰਦੇ ਅੱਜ ਦਿਹਾਉ ਜੋਤ ਤਾਂ ਪੀਂਦੇ ਉਹਨਾਂ ਦਾ ਸੋਗ ਦੇ ਸੀਦਾ ਤੇ ਅੰਦਰ ਦੇ ਸਾਧਨ ਹੁੰਦੇ ਨੇ ਕੀਤੇ ਕੋਈ ਹਾਂਜੀ ਜੇ ਨਿਰੰਜਨ ਨਿਰੰਕਾਰ ਨਿਰਵਾਣ ਜਦ ਅੰਦਰ ਨਿਰੰਕਾਰ ਨਿਰਵਾਣ ਹੋਵੇ ਨਿਰਵਾਣ ਹੋਵੇ ਬੋਧਾ ਜਿਹੜਾ ਮੈਂ ਕੌਣ ਆਹ ਹੈ ਜੀ ਬੋਧਣ ਕੋ ਬਾਣ ਕੌਣ ਬੋਧਾ ਬੋਧਾ ਹੋਣਾ ਤੇ ਕਿਤੇ ਨਿਰਵਾਣ ਜਦ ਨਿਰਵਾਣ ਬਾਤ ਨੂੰ ਪ੍ਰਾਪਤ ਹੋ ਗਿਆ ਜਦ ਕੋਈ ਇੱਛਾ ਹੀ ਨਹੀਂ ਨਿਰਵਾਣ ਕਰਨੇ ਕਿ ਇੱਛਾ ਨਾ ਰਹੇ ਕੁਝ ਵੀ ਨਿਰਵਾਣ ਹੋ ਜਾਣਾ ਬੋਧਾ ਕਿ ਨਾ ਕਰ ਜਿਹੜੇ ਜਿੱਚਾ ਜਦ ਕੋਈ ਇੱਛਾ ਨਹੀਂ ਰਹਿਣੀ ਮੁਕਤੀ ਪ੍ਰਾਪਤ ਕਰ ਜਾਂਦਾ ਨਿਰਵਾਣ ਹੋ ਜਾਂਦਾ ਇਹ ਮੁਕਤੀ ਪ੍ਰਾਪਤ ਕਰਈ ਹੈ ਜੋ ਕੋਣ ਬ੍ਰਹਮ ਦੀ ਵਸਾ ਦੀਓ ਕਰ ਚਲਦੀ ਐ ਇਥੇ ਇਸ ਫੋ ਨਿਰੰਕਾਰ ਨਿਰਵਾਣ ਨਿਰੰਕਾਰ ਹੈ ਉਹ ਕਾਲੀ ਹੈ ਉਹ ਕਾਰ ਨਹੀਂ ਹੈ ਜਿਹਨ ਕਾਰ ਇਕਮ ਕਾਰ ਜਿਹੜਾ ਹੈ ਉਹ ਜੋਤਦਾ ਹੀ ਹੈ ਸਿਰ ਪੂਰਨ ਭ੍ਰੰਟੀ ਗੱਲ ਹੈ ਉਹ ਪੂਰਨ ਭ੍ਰੰ ਨਹੀਂ ਉਹ ਕਾਰ ਪ੍ਰੋਬਲਮ ਦੀ ਗੱਲ ਹੈ ਉਹ ਦੇ ਵਿੱਚ ਆਕਾਰ ਹੈ ਜਿੱਤੇ ਆਕਾਰ ਦੀ ਕਾਰ ਦੇ ਵਿੱਚ ਜੋ ਇੱਕੋ ਹੀ ਆਕਾਰ ਹੈ ਇੱਕੋ ਹੀ ਜਿਹੜਾ ਜੋਤੇ ਜੋ ਹੁੰਦਾ ਹੈ ਆਕਾਰ ਤਾਂ ਹੈ ਪਰ ਇੱਕੋ ਹੀ ਹੈ ਇਕਮ ਦੇ ਵਿੱਚ ਵੀ ਇੱਕੋ ਹੀ ਆਕਾਰ ਹੈ ਦੂਆ ਸ਼ਬਦ ਵਾਲਾ ਹੈ ਉਹ ਜੋ ਹੁੰਦੇ ਹਨ ਇਹ ਕਾ ਉਹ ਅਕਾਰ ਜੈ ਜਨ ਜੰਜਨ ਨਰੰਕਾਰ ਨਿਰਵਾਣ ਨਿਰਵਾਣ ਤੇ ਕਹਉ ਕੋ ਮਹਾਨ ਕੋਣੋ ਬਿਮਾਰ ਨਾ ਤਾਂ ਮਹਾਨ ਹੈ ਨਾ ਤਾਂ ਚਿੱਤ ਨੂੰ ਵਾਣ ਮੈਂ ਚਿੱਤ ਨੂੰ ਵਾਣ ਨਹੀਂ ਹੈ ਉਹ ਨੂੰ ਵਾਣ ਨਹੀਂ ਦੋਹਾਂ ਦੇ ਉਹਨੇ ਬਹੁਤ ਛਟਿਆ ਹੋਇਆ ਉਹਦੇ ਉਹ ਛਟਿਆ ਤੇ ਐਸੇ ਤੈ ਹਵਾਨ ਹੋਰ ਬਹੁਤ ਕੋਈ ਨਹੀਂ। ਤੋਂ ਇਹ ਦੁਸਤੀ ਜਾਣੇ। ਜਿਸ ਰੂਪ ਕੇਵਲ ਜਗਦੀਸ਼ ਸੱਲ ਛੱਦਰ ਲਗਤ ਕੋਕੀਸ਼। ਜਿਸ ਰੂਪ ਕੇਵਲ ਜਗਦੀਸ਼। ਜੇ ਜਗਦੀਸ਼ ਦਾ ਹੀ ਜਗਤ ঈਸ਼ਤਾ ਇਸ ਰੂਪ ਰਹੇਗਾ ਅਗਲਾ ਬੋਲ ਰਖਦਾ। ਇਹਦੇ ਆਗਾ ਡਣਾ ਆਏ ਨਾ ਸਾਰੇ ਨੂੰ ਇਕੱਠੇ ਲੈ ਜੀ। ਉਹ ਨਮਰੋ ਦੇ ਉਹ ਨਮਰੋ ਵਖਰੇ ਵਖਰੇ ਨਾਉਣੇ ਸਾਰੇ ਲੈ ਜੇ ਕਹਿੰਦੇ ਜਦ ਕੱਲਾ ਹੀ ਜਗਦੀਸ਼ ਹੈ ਜਦ ਤੀਸ਼ ਹੈ ਤਾਂ ਸਾਰਿਆਂ ਨੂੰ ਜਗਦੀਸ਼ ਦਾ ਸਰੂਪ ਦਿਆ ਨਾ ਕਿ ਕੱਲਾ ਜਗਦੀਸ਼ ਹੈ ਜਗਦੀਸ਼ ਹੈ ਸਿਰ ਛਾਲਾ ਤੇ ਜੇ ਤੁਸੀਂ ਕਹੋਗੇ ਛੜੇ ਗਏ ਛੜਿਆ ਕੌਣ ਗਿਆ ਕਿਨੇ ਛੜਿਆ ਸਾਲ ਛਤਰ ਕੇ ਮੇਲਾ ਗਿਆ ਮਾਇਆ ਰੂਪ ਕਲ ਮਾਇਆ ਚੱਲ ਰਹੀ ਹੈ ਮਾਇਆ ਦੇ ਚੜ ਜਾਗੇ ਆਗੇ ਸਾਲ ਲੱਗ ਜਾਂਦਾ ਰੱਜਣ ਨੂੰ ਲੱਗਦਾ ਛਾੜੇ ਇਹ ਸਰੂਪੀ ਜੋਤ ਸੰਗ ਸਮਾਵੇ ਕਿ ਕਿਸੇ ਕੋ ਗਵਨ ਤਰਫ ਤਰਪਤਾ ਹੈ ਜਾਂ ਜੋਤ ਰੂਪੀ ਮਾਨ ਹੈ ਜਿਹੜਾ ਜੋਤ ਰੂਪੀ ਮਾਨਾ ਮੰਨਦੇ ਜੋਤ ਰੂਪ ਹੈ ਜਾਂ ਜੋਤ ਰੂਪੀ ਮਾਨਾ ਆਪਣੇ ਮੂਰਦਨ ਸਮਾਇਆ ਹੁੰਦਾ ਹੈ ਕਿਥੋਂ ਪੈਦਾ ਹੁੰਦਾ ਆਪਣੇ ਮੂਰ ਨਾਲ ਜੁੜਿਆ ਹੋਇਆ ਹੁੰਦਾ ਜੋਤ ਮਨ ਸਮਾਇਆ ਹੋਇਆ ਹੁੰਦਾ ਤਾਂ ਭੁੱਖ ਕਿਹਨੂੰ ਫਿਰ ਲੈ ਕਿਹਨੂੰ ਕੋ ਤਬਰ ਤਰਸਦਾ ਹੈ ਅਈਓ ਦੱਸ ਸਰ ਉਦੋਂ ਤਾਂ ਖੁਸ਼ੀ ਹੋਣੀ ਮੰਦੀ ਭੁੱਖਾ ਦਾ ਅੱਡ ਹੋ ਜਾਂਦਾ ਹੈ ਅੱਡ ਹੋ ਕੇ ਹੀ ਭੁੱਖ ਲੱਗਦੀ ਹੈ ਨੂੰ ਖਰਾ ਹੋ ਕੇ ਭੁੱਖ ਲੱਗਦੀ ਹੈ ਰਸਤਾ ਉੱਤੇ ਉਹਨੂੰ ਮਿਲਦੇ ਆ ਰਸ ਦੇਖਿਆ ਕੱਠਾ ਦਾ ਰਸ ਬਣੇ ਜੋ ਉਸ ਰੂਪੇ ਜੋ ਸੰਸਮਾਵਾ ਹੈ ਇਹ ਜਦੋਂ ਪੇੜ ਦੇ ਉੱਤੇ ਲੱਗਿਆ ਹੋਇਆ ਹੈ ਫਲ ਉਹਦੋਂ ਉਹ ਆਟੋਮੈਟਿਕ ਰਸ ਆਪਰੇ ਹੋ ਜਾਂਦਾ ਇਹਨਾਂ ਦੀਆਂ ਦਾ ਰਸ ਕਿੱਥੇ ਵੀ ਆਉਂਦਾ ਫਰਾਦਾ ਰਿਹਾ ਅਡਹੁ ਕਾ ਉਹ ਪੇੜ ਤੋਂ ਤਾਂ ਜਿਵੇਂ ਜਿਹੜਾ ਅਸੀਂ ਕਮਲ ਕਰਾਉਂ ਬੱਚਾ ਜਨਮ ਜਨ ਕਰ ਬੱਚਾ ਪੈ ਰਾਖਾਉਂਦੇ ਨੇ ਜਦੋਂ ਬੱਚਾ ਕਰਮ ਦੇ ਵਿੱਚ ਆ ਰਾਸ ਉਹਨੂੰ ਆਪੇ ਆਟੋਮੈਟਿਕ ਆਉਂਦਾ ਈਵੇਂ ਜਦ ਮਨ ਸਮਾਇ ਰਾਸ ਹੁੰਦਾ ਜੇ ਤੋਂ ਪਾ ਗਿਆ ਹੋਇਆ ਦਰਬ ਕੀ ਹੈ ਆਪਣੀ ਜੋ ਉਸ ਤੇ ਉਧਰੋਂ ਤਰ ਪੁੱਖ ਦੇ ਮੈਨੂੰ ਪਿਆਸ ਕਿ ਪਾਣੀ ਪਿਆਸ ਕੋ ਕਿੱਥੇ ਦੁਨੀਆ ਦੇ ਬਾਹਰ ਹੁੰਦਾ ਹੈ। ਅਚਰ ਨਹੀਂ ਹੁੰਦਾ। ਮਾਇਆ ਮਰ ਬਤਾਇਆ। ਫੇਰ ਕੋ ਖਲ੍ਹਵੀ ਹੈ। ਜਦ ਮਾਇਆ ਜੀ ਆ ਕੇ ਪ੍ਰਵੇਸ਼ ਕਰਦਾ ਬਾਹਰ ਛੱਡ ਕੇ ਆਪਣੇ ਗੂੜ੍ਹ ਨੂੰ ਫੇਰ ਕੋ ਤ੍ਰਿਸ ਨੂੰ ਹੈ ਲੈ ਜੁੜ ਕੇ ਜਦ ਜੀ ਉਹ ਲੈਵ ਦੇ ਵਿੱਚ ਹੀ ਰਸਾ ਹੈ ਉਸ ਨੂੰ। ਜੇ ਹੁਰਬੀ ਲਿਵ ਲੱਗ ਜਵੇ ਰਸੁਲ ਤੀ ਸ਼ੁਰੂ ਹੋ ਜੂਗਾ ਉਹੀ ਲਿਵ ਲਾਉਂਦੀ ਹੈ ਹੁਣ ਦੁਬਾਰਾ ਲਿਵ ਦੇ ਵਿੱਚ ਰਸ ਹੈ ਕੋਈ ਰਾਹ ਨਹੀਂ ਲਿਵ ਤਾ ਅਸ ਰਾਹ ਹੈ ਕਿਆ ਦਾ ਰਾਸ ਹੋ ਜੂ ਲਿਵ ਦੇ ਵਿੱਚ ਸ਼ੁਰੂ ਧੁਖ ਮਰ ਜੂਗੀ ਦੁਬਾਰਾ ਆਏ ਫਿਰ ਭੱਜਿਆ ਫਿਰ ਉਹ ਤਾਂ ਆਦਿ ਭੱਜ ਆਪਣੇ ਕੋ ਘੁੱਪਿਆ ਸੂਰੀ ਕਾ ਪਾਜ ਸੋ ਸਾਰੀ ਭੱਜਣਾ ਦੌੜ ਹੈ ਮਾਇਆ ਦੀ ਦੌੜ ਨਹੀਂ ਹੈ ਜਦ ਦੌੜ ਹੈ ਉਹ ਕੁਪੈਰ ਨੂੰ ਦੂਰ ਕਰਨ ਵਾਸਤੇ ਜਾਂ ਫਿਰ ਲਗ ਲੱਗ ਜਾ ਗਰਮ ਲੱਗੀ ਸੀ ਦੌੜ ਦੀ ਲੋੜ ਨਹੀਂ ਸੀ ਉਹ ਲੇਵ ਛੁੱਟ ਕੇ ਹਮ ਦੌੜ ਸ਼ੁਰੂ ਹੋ ਗਈ ਇਹ ਦੋ ਦੇ ਵਿੱਚ ਤੇ ਰਸਤਾ ਕੋਈ ਨਹੀਂ ਨਿਕਟਾ ਦੌੜਾ ਜਦ ਦੌੜ ਹੈ ਆਪਣੇ ਕੋਸ਼ਿਸ਼ਾਂ ਨਾਲ ਜਮਰੀ ਖਾਲ ਹੈ ਲੱਭ ਲੈ ਖਾਸੂ ਕਿਥੇ ਕੁਝ ਕਮਾਲ ਹੈ ਬਸਲੇ ਕੁਝ ਗੱਲ ਹੈ ਖਾਲ ਹੈ ਇਹ ਆਪਰੇ ਰੋਪੇ ਆਪਣੇ ਗੁਰੂ ਨੂੰ ਸਮਝਾ ਲੇਵਲਾ ਲੇਵਲਾ ਬੋ ਤੇ ਸਰਾਮ ਨਹੀਂ ਆਪਣੇ ਰਾਮ ਕੀ ਅੰਸ ਹੈ ਆਪਣੇ ਗੁਰੂ ਨਾਲ ਲੇਵਲਾ ਲਵਤਰਾ ਜਾਊਗਾ ਇਹ ਤਨ ਬਜਨ ਖੰਦੀ ਰੋਲਦੀ ਤਾਂ ਜਦ ਜੋਤ ਰੂਪੀ ਜੋਤ ਸੰਗ ਸਮਾਵਾ ਹੈ ਤਾਂ ਕਿਸੇ ਭੁੱਖ ਕਬਨ ਤ੍ਰਸਦਾ ਹੈ ਉਹ ਭੁੱਖੇ ਜਿਹੜੇ ਨਹੀਂ ਜਦ ਆਪਣਾ ਆਰਾਮ ਨਾਲ ਲੱਭ ਲੀ ਹੋਈ ਉਹ ਤੇ ਨਹੀਂ ਤੇ ਸਮਾਇਆ ਹੋਗਾ ਫਿਰ ਤ੍ਰਸਦਾ ਤਾਂ ਤਾਂ ਸਵਾਲ ਹੋਊ ਜੇ ਭੁਖੂ ਦਾ ਸਵਾਲ ਕਿੱਥੇ ਪੈਦਾ ਹੋਇਆ ਭੁੱਖ ਮੜਾਉਣ ਦਾ ਸਵਾਲ ਤਾਂ ਜੇ ਕੋ ਖੋਵੇ ਜਾਂ ਕੋ ਕਹੀ ਉਹ ਘਵਾਂ ਤੇ ਭਜਣ ਦੀ ਨੱਠਣ ਦੀ ਜਦਨ ਲੋੜ ਕਿੱਥੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇਗਾ ਨਾਹੀਂ ਸਮਾਰ ਕਰਨ ਕਰਾਵਣ ਕਰਨੇ ਹਾਰ ਇਹ ਕਰਤਾ ਨਾ ਇਹੀ ਸਾਰੀ ਕਰਾਮਾਤ ਕਰਦਾ ਇਹੀ ਖੇਡਦਾ ਛੇੜਾ ਆਪਣਾ ਲੈਂਦਾ ਹੈ ਆਪਣੇ ਮੋਢ ਨੂੰ ਛੱਡ ਕੇ ਜਦ ਪਰੇ ਹੋ ਜਾਂਦਾ ਨਾ ਇਹ ਇਹ ਗੱਲ ਕੱਲ ਨੂੰ ਤਾਂ ਕਰਾਮਾਤ ਗਲਤੀ फेर ਕੁ ਫਾਇਦਾ ਹੋ ਜਾਂਦੀ ਹੈ ਗੰਦੇ ਜ਼ਰਾਬ ਨੂੰ। ਇਹ ਕਰਨੇ ਆ ਰਹੇ ਗੰਦੇ ਜ਼ਰਾਬ ਨੂੰ ਕੁ ਫਾਇਦਾ ਕਰਨ ਵਾਲਾ ਕੇ ਪਰੇ। ਲੜ ਚਾ। ਹਵਾਏ ਜਾ ਜਾਂ ਲੜਦਾ ਕੋਈ ਆਦਮੀ। ਫੜੇ ਉਹਨੇ ਢੱਡੇ। ਹਨੇ ਛੱਡ ਕੇ ਦੇਖਾ। ਇੱਕ ਬੰਦੇ ਲੱਗ ਰਿਹਾ ਲੋਕ ਦਾ ਦਾ ਜਦੋਂ ਇੱਕ ਵਾਰ ਤੇ ਛੱਡਦਾ ਸਹੀ ਫੇਰ ਭੱਜ ਲਈ ਫੇਰ ਭੱਜ ਲਈ ਮੈਂ ਡਿੱਗਦਾ ਰੇ ਫੇਰ ਥੱਲੇ ਥੱਲੇ ਆਏਗਾ ਤੱਕ ਛੱਡ ਕੇ ਦੇਖਦਾ ਹੱਥ ਲੈ ਮੈਂ ਛੱਡ ਕੇ ਦੇਖਾਂ ਬਲ ਮੈਂ ਕਿੱਥੇ ਡਿੱਗ ਗਿਆ ਅੱਛਾ ਆ ਨਹੀਂ ਫੇਰ ਫੇਰ ਨਹੀਂ ਆਉਂਦਾ ਛੱਡਦਾ ਜਾਨੀ ਨਾ ਨੂੰ ਕਰਤੇ ਕਾ ਨਹੀਂ ਸੁਭਾਅ ਆਨ ਕਰਤੇ ਕਾ ਨਹੀਂ ਕਰਤੇ ਦਾ ਕੋਈ ਇਸਮਾਲ ਨਹੀਂ ਤੇ ਇਹ ਕਰਾ ਮਾਤਾ ਮੈਂ ਕੋਈ ਇਸਮਾਲ ਨਹੀਂ ਕਲਾ ਮਤਾ ਬਹੁਤ ਗਲਦਾ ਕਲਾ ਘਰ ਬਹੁਤਾ ਕਲਾਕਾਰੀ ਜੇ ਫਸਾਇਆ ਫੜੀ ਇਹ ਕਲਾਕਾਰੀ ਤੈਨੂੰ ਫਸਾਇਆ ਇਹਨੇ ਆਪਣੀਆਂ ਗੱਲ ਨਹੀਂ ਸਾਡੀ ਅਕਲ ਸੰਧੂ ਫਸਾਉਣ ਵਾਲੀ ਹੈ ਆਦਮੀ ਦੀ ਅਕਲ ਸੰਸਾਦ ਦੀ ਅਕਲ ਸੰਸਾਦ ਨੂੰ ਫਸਾਉਣ ਵਾਲੀ ਹੈ ਸਿਖਾਉਣ ਵਾਲੀ ਨਹੀਂ ਜੋ ਕੈਦਾ ਕਰ ਸਕਦੇ ਆ ਕਲ ਸੁਖ ਪੈਦਾ ਕਰ ਨਹੀਂ ਸਕਦੇ ਜੋ ਸਾਰਾ ਜੋ ਕੁਝ ਕੀਤਾ ਹੈ ਜੋ ਕੁਝ ਕਰ ਰਿਹਾ ਜੋ ਦੁੱਖ ਨਿਕਲਣੇ ਸੋ ਕਦੇ ਨਹੀਂ ਨਿਕਲਣੇ ਅੰਕ ਨਾ ਇਕਲੇ ਜਿਹੜੇ ਸੁਖ ਵੀ ਕਹਿੰਦੇ ਨੇ ਸਾਧੂ ਹੈ ਅਸਲ ਤੇ ਉਹ ਸੁਖ ਨਹੀਂ ਹੈ ਜੇ ਸੁਖ ਹੁੰਦੇ ਤਾਂ ਤੁਹਾਡੇ ਪ੍ਰੈਸ਼ਰ ਤਰੱਕੀ ਤੋਂ ਬਾਅਦ ਨਿਕਲਦਾ ਡਿਪਰੈਸ਼ਨ ਨਾ ਨਿਕਲਦਾ ਵਿੱਚੋਂ ਉਹ ਜੀ ਜਿਹੜੇ ਜੀਦਾ ਲਾਏ ਕੋਈ ਨਹੀਂ ਉਹ ਜਿਹੜੀ ਬਿਮਾਰੀ ਨਿਕਲੀ ਆ ਵਿੱਚੋਂ ਗਾਹਾਂ ਜਾ ਕੇ ਨਾ ਰੜਕ ਰੜਕੇ ਰੜਕ ਰੜਕੇ ਉਹ ਗਾਹਾਂ ਰਿੱਕੀ ਗੇ ਡਿਪਰੈਸ਼ਨ ਉਹ ਕੀ ਆ ਉਹ ਭਰਮ ਚੋਂ ਪੈ ਨਿਕਲੀ ਆ ਉਹੀ ਭਰਮ ਚੋਂ ਪੈ ਨਿਕਲੀ ਹੋਊ ਡਿਪਰੈਸ਼ਨ ਭਰਮ ਚੋਂ ਹੀ ਪੈ ਤਾ ਜਾਂ ਸੁੱਕੀ ਜੰਮ ਕੇ ਦਰਾਸ ਜੰਮ ਕੇ ਦਰਾਸ ਹੈ ਡਿਪਰੈਸ਼ਨ ਜਦ ਕੀ ਤਰਾਸ ਨਿਕਲੀ ਆ ਉਹਨਾਂ ਨੂੰ ਕੋਲੋਂ ਵੀ ਕਾਲੇ ਬੋਢੀ ਮਰਨ ਤੋਂ ਰੋਤੇ ਨੇ ਜਦ ਕੀ ਤਰਾਸ ਆਉਂਦੀ ਹੈ ਲਾਉਣਾ ਕਾਲੇ ਬਾਤੇ ਅਸੀਂ ਤਾਂ ਖਾਂ ਵੀ ਜਾਣੀ ਜਾਨੀ ਅਸੀਂ ਕਹਿੰਦੇ ਲੜੀਏ ਵੀ ਇਹਨਾਂ ਖਾਤਰ ਪੀਣਾ ਵਾਸਤੇ ਇਹ ਸਾਰੇ ਸੌਫੀ ਤੇ ਤਰਕਾਬਾ ਉਹਨੂੰ ਲਈਏ ਜਿਹਦੀ ਤਰਕਾਬਾ ਕਦੇ ਦੇ ਉਹ ਕਹਿੰਦੇ ਅਸੀਂ ਰੋਸਦੇ ਹੀ ਸੀ ਰੋਟੀ ਉਹਨੂੰ ਦੇ ਖਾਲਾਂਗੇ ਬਾਕੀ ਉਹ ਜੇ ਗੱਲ ਕਰੀਏ 20 ਵਰ੍ਹੇ ਅਸੀਂ ਕੀ ਬਣਾਣਾ ਇੱਛਾ ਗਈ ਹੋ ਜਾਂ ਲਾ ਪੁਲਿਸ ਕੋ ਬਾਕੀ ਆਜਾ ਹਾਂ ਹੋਰੇ ਬਾਕੀ ਹੋ ਗਏ ਹਾਂਜੀ ਹੋ ਗਈ ਗਰੀਬਾਂ ਨੂੰ ਕੀ ਕਰਨਾ ਲਈ ਬਰੀਅਤ ਉਹ ਗਰੀਬਾਂ ਦੇ ਸੁਲਾਹ ਕਾਦਣ ਬੈਕੂ ਹੋ ਇਹਨਾਂ ਨੂੰ ਬਾਹਰ ਘਟੋ ਕੇ ਬਾਹਰ ਮਾਰ ਭਾਈ ਥੋੜੀ ਖਾ ਲੋ ਕਿਉਂ ਲੜਦੇ ਹੋ ਉਹ ਲਾਡੂਆਂ ਦੇ ਸਾਰੇ ਨਿਆਣੇ ਨੇ ਉਹ ਦੁਖੀ ਹੁੰਦੇ ਨੇ ਪਿੱਛੋਂ ਜਾਂ ਮਰੀ ਜਾਂਦੇ ਹੋ ਉਹਨੇ ਹਰ ਬੰਕੇ ਵਿਹਾੜੇ ਬੈ ਕੇ ਅਗਲਾਏ ਬੈ ਕੇ ਸੋਚ ਲੋ ਵਿਚਾਰ ਕਰ ਲੋ ਸੁੱਖ ਸੁੱਖ ਲੈਣਾ ਨਾ ਸੁੱਖ ਕਿਹੜੀ ਗੱਲ ਜਾਂ ਲੱਡੂ ਚ ਸੁੱਖ ਆ ਉਹ ਥੋੜੀ ਥੋੜੀ ਥੋੜੀ ਖਾ ਸਾਰੇ ਸੁਖੀ ਤਾਂ ਰਹੋ ਜਿਹੜਾ ਬਾਪ ਮਾਰ ਗਿਆ ਨਿਆਣੇ ਰੁੱਲ ਗਏ ਬੱਚੇ ਰੋਲ ਗਏ ਵਕਿਆ ਨਾ ਫਿਰ ਆਪ ਘਰੋਂ ਬਾਹਰ ਇਹ ਸਭ ਕੀ ਹੈ ਅ ਜਿਹੜੇ ਹਵਾਈ ਜਾਨ ਫਿਰਦੇ ਨੇ ਨਾ ਫੁਕਾਰੀ ਇਹ ਨਾ ਨਹੀਂ ਕਰਵਾ ਮਾਤੇ ਉਹ ਕਹਿੰਦਾ ਵੀ ਮੇਰਾ ਜੋ ਮੈਂ ਕਹਿੰਦਾ ਸਾਰੀ ਵਰਲਡ ਬੰਦ ਹੈ ਉਹ ਇਹ ਹੰਕਾਰ ਹੈ ਜਿਹੜਾ ਮੇਰੇ ਕੋਲ ਸਾਰੀ ਮਾਇਆ ਹੋਵੇ ਜੋ ਮੈਂ ਦੁਨੋ ਕੇ ਹੱਥੋਂ ਮੋਲੂ ਆ ਇਹ ਹੰਕਾਰ ਹੈ ਨਾ ਇਹਨੇ ਬੜੇ ਭਾਇੇ ਮੇਰੇ ਹੱਥੇ ਸਾਰੀ ਪਾਵਰ ਆ ਗਈ। ਇਹਦੇ ਸਾਰੇ ਪਾਵਰ। ਪਰਮੇਸ਼ਰ ਦਾ ਕੋਣ ਸਾਰੀ ਪਾਵਰ ਹੈ ਉਹਦੇ ਪਾਣੀ ਚੱਲੀਏ ਸਾਰੇ ਰਲ ਮਿਲ ਕੇ। ਤੇ ਸਾਰਾ ਬੁਝਾ ਲਓਗੇ। ਸਾਡੇ ਆਲਾ ਬਣ ਲਾ। ਤਾਂ ਆਪਣਾ ਘਰੇ ਵਜਾ ਲੈਣਾ। ਕਹਿੰਦੇ ਕੰਮ ਜੇ ਕੀ ਹੋਣ ਵਾਲੀ ਹੈ ਸੁਪਰ ਪਾਵਰ ਦਾ ਜਾਲ ਬਣਾ ਗਏ ਜਦ ਘਰ ਤੇ ਸੁਲਾ ਹੋਊਗੀ ਆਪਣਾ ਇੱਕ ਦੂਰ ਨੂੰ ਦੇਖ ਕੇ ਤੂੰ ਸੁਪਰ ਪਾਵਰ ਕਿੱਥੋਂ ਬਣਦੀ ਨਾਲੇ ਕਿਤੇ ਇੱਡੀਆ ਵਾਲੇ ਇੱਡੀਆ ਬਸ ਪਾਕਿਸਤਾਨ ਦੇ ਵਿੱਚ ਸੀ ਬੰਗਲਾਦੇਸ਼ ਵਿੱਚ ਸੀ ਹਰ ਪਲ ਨੂੰ ਬਚਾਈ ਜੀ ਰਬਰ ਬਾਬਰ ਕਹਾਂ ਜੇ ਸਾਰੇ ਨੂੰ ਇਕੱਠੇ ਕਰਕੇ ਸੁਲਾ ਕਰ ਦੋ ਪਾਵਰ ਖੜੀ ਨਾ ਪਾਵਰ ਜਦੋਂ ਪਾਵਰ ਤੋਂ ਤੁਸੀਂ ਪਾਵਰ ਪਰਮੇਸ਼ਰ ਦੀ ਮੰਨੋਗੇ ਸੁਪਰ ਪਾਵਰ ਹੁੰਦੀ ਹੋ ਜਾਵੇ ਸੁਪਰ ਪਾਵਰ ਦਾ ਬ੍ਰੰਧ ਦੀਏ ਉਹ ਬ੍ਰੰਧ ਦੀਏ ਜੇ ਉਹ ਚਿੰਤਾ ਹੈ ਉਹਦੀ ਸੁਪਰ ਪਾਵਰ ਸੌਹ ਲਈਏ ਜੇ ਅੰਦਰ ਜਮਕੀਤ ਰਾ ਅਸਰ ਨੂੰ ਸੁਪਰ ਪਾਵਰ ਕਹਦੀ ਇਹ ਦਿਨੋਂ ਰਾਤੋਂ ਦਦੀ ਦੀਓ ਤੇ ਸੁਪਰ ਪਾਵਰ ਹੈ ਸੁਪਰ ਪਾਵਰ ਨੂੰ ਜਿਹੜੂ ਕੋਈ ਖਤਰਾ ਨਹੀਂ ਜਿਹਨੂੰ ਕਤੋਂ ਕੋਈ ਖਤਰਾ ਇਹਦੀ ਸੁਪਰ ਪਾਵਰ ਉਹ ਹੈ ਜਿਹਦਾ ਕੋਈ ਸ਼ਰੀਰ ਨਹੀਂ ਹੋ ਅਸੋ ਦਾ ਸਾਨੂੰ ਖਤਰਾ ਹੈ ਅਸਲੀ ਸੁਪਰ ਪਾਵਰ ਹੈ ਹਜ਼ਰਤ ਅਮਰੀਕਾ ਨੂੰ ਹੈ ਨਤ ਨੂੰ ਹੈ ਧਰਮ ਨੂੰ ਸੁਪਰ ਪਾਵਰ ਕਹਦੀ ਹੈ ਇਹਨਾਂ ਦੇ ਦਿਮਾਗ ਦੇ ਘੜੇ ਹੋਏ ਲੋਕ ਨੇ ਕਿ ਦੇ ਪਾਗਲਾਂ ਦੇ ਜਿਨ੍ਹਾਂ ਨੇ ਫਿਰਤਾ ਕੀਆ ਸੰਤ ਸਾਹਿਬ ਨੂੰ ਚੇਤਾਲੇ ਪੀਏ ਸੁਧਰੂ ਸੰਤ ਸਾਹਿਬ ਨੂੰ ਕੀ ਦਿੱਤੀ ਚਿੰਤਾ ਆਪ ਨੂੰ ਆਪ ਨੂੰ ਵੀ ਚਿੰਤਾ ਹੈ ਸੰਤ ਸਾਹਿਬ ਨੂੰ ਕਿੰਨਾ ਜੋ ਪਰਮਾਤਮਾ ਪਰਮੇਸ਼ਰਾਂ ਨੂੰ ਕੋਈ ਫਿਕਰ ਨਹੀਂ ਜੋ ਪਰਮਾਤਮਾ ਨੂੰ ਕੋਈ ਫਿਕਰ ਹੁੰਦਾ